ਮੋਹ ਹੈ ਜੀ ਉਪਦੇਸ਼ ਛੇ ਅਖਰ ਅੱਖਰ ਤੋਂ ਚਾਰੇ ਬਾਣੀਆਂ ਚ ਉਪਦੇਸ਼ ਹੈਗਾ ਜੀ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦਾ ਹੈ 13 ਨੰਬਰ ਪੌੜੀ ਛੱਛਾ ਇਹ ਹੈ ਛਤਰਪਤੀ ਪਾਸਾ ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ ਇਹ ਛਤਰਪਤੀ ਪਾਸਾ ਛਤਰਪਤੀ ਜਿਹੜੇ ਰਾਜੇ ਹੁੰਦੇ ਨੇ ਨਾ ਰਾਜਾਂ ਦੇ ਰਾਜੇ ਉਹਨਾਂ ਵਾਲੀ ਸਾਈਡ ਹੈ ਸਾਈਡ ਹੈ ਛੱਕ ਕੇ ਨਾ ਰਹੋ ਮਾਇਆ ਦੀ ਭੁਗ ਮਾਇਆ ਤੋਂ ਸੰਤੋਖ ਰਹੋ ਆਨੰਦ ਰਹੋ ਮਾਇਆ ਵਾਲੇ ਜੋ ਮਿਲ ਗਿਆ ਬਿਆਨ ਤੈ ਉਹ। ਜੋਨੇ ਦਿੱਤਾ ਬਿਆਨ ਤ। ਚੱਕੀ ਨਾ ਰਹੋ। ਸਾੜ ਕੀ ਨਾ ਆਸਾ ਮਾਇਆ ਦੀ ਆਸ ਹੈ ਤਿਆਗ ਦੋ। ਜੋ ਦਊਗਾ ਉਹਦੀ ਮਰਜ਼ੀ ਹੈ। ਦਰੀਦੂ ਉਤੋਂ ਦੀ ਮਰਜ਼ੀ ਹੈ। ਇਹ ਛਤਰ ਰਾਜਿਆਂ ਦਾ ਪਾਸਾ ਹੈ। ਤੇ ਛੋਟੇ ਰਾਜਿਆਂ ਵਾਲੀ ਗੱਲ ਨਹੀਂ ਵੱਡੇ ਰਾਜਾ। ਸਰਸ਼ਾਹ ਪਾਸ਼ਾਹਾਂ ਦਾ ਪਾਸਾ ਹੈ। ਮਾਇਆ ਦੀ ਭੁੱਖ ਮਿਟਾ ਕੇ ਰਖੋ ਉਦੋਂ। ਮਾਇਆ ਦੀ ਭੁੱਖ ਰਖੋਈ ਨਾ। ਛੱਕ ਰਹਿਣਾ ਰੱਜੇ ਰਹਿਣਾ। ਰਹੋ ਛਾੜੀ ਨਾ ਸਾਸ ਆਸ ਆਸਿਆ ਕੇ ਰੋ ਹਮਾਰਾ ਜੀ ਜੂ ਨਹੀਂ ਨਾ ਜਿੱਥੇ ਨਾ ਰਹੋ ਨਹੀਂ ਯੂਪੀ ਦੀ ਬੋਲੀ ਹੈ ਬੋਲਦੇ ਨੇ ਆਪਾਂ ਕਹਿੰਦੇ ਪ੍ਰਸ਼ਾਦਾ ਛੱਕ ਲਿਆ ਮੈਂ ਰੱਜ ਗਿਆ ਪ੍ਰਸ਼ਾਦੇ ਰ ਕੀ ਪਾਵੇ ਛੱਕ ਕੇ ਨਾ ਰਹੋ ਕਿਉਂ ਨਹੀਂ ਰਹਿੰਦੇ ਰੱਜੇ ਭੁੱਖੇ ਕਾਤੇ ਰਹਿੰਦੇ ਹੋ ਧੁਖ ਕਿਉਂ ਦਿਖਾਉਂਦੇ ਹੋ ਭੁੱਖ ਦਾ ਉਲਟ ਛੱਕਿਆ ਰਹਣਾ ਅੱਛਾ ਵੀ ਰੱਜੇ ਰਹੋ ਜੋ ਵੀ ਦਿੱਤਾ ਪਰਮੇਸ਼ਰ ਨੇ ਅੱਛਾ ਛਾੜ ਕੇ ਨਾ ਆਸਾ ਹਾਂ ਆਸਾ ਛਡੋ ਵੀ ਹੋਰ ਮਿਲੇ ਨਾ ਮਿਲੇ ਅੱਛਾ ਜੀ ਜੇ ਭੁੱਖ ਦੇਈ ਤੇ ਹੀ ਰਾਜਾ ਠੀਕ ਹੈ ਜੀ ਸੁਖ ਰੇ ਮਨ ਮੈਂ ਤੋਂ ਛਿਨ ਛਿਨ ਸਮਝਾਵਾਂ ਤਾਹੇ ਛਾੜ ਕਤ ਆਪ ਵਧਾਵਾਂ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ ਹਾ ਤੈਨੂੰ ਸਿੰਸ਼ਣਾ ਕਹਿ ਰਿਹਾ ਇਹ ਬੁੱਧੀ ਤੈਨੂੰ ਆਪ ਨੂੰ ਕਿਉਂ ਦੇ ਵਿੱਚ ਫਸਦਾ ਹੈ ਆਪਣੇ ਆਪ ਨੂੰ ਉਹ ਤੋਂ ਮਾਇਆ ਨਾ ਆਪ ਬੰਦ ਰਹਿਣ ਆਪਣੀ ਗਲਤੀ ਨਾਲ ਤਿਰਕੁਡੀ ਚ ਮੋੜ ਬੰਨ ਜਾਂਦਾ ਉਹ ਤੇ ਨਗਾ ਉਹ ਤੇ ਮਾਇਆ ਸੰਸਾਰ ਨਾਲ ਦੁਰਦਲ ਤਿਰਕੁਡੀ ਜਾ ਕੇ ਉੱਥੇ ਵੱਜਣਾ ਤੇ ਵੱਜਿਆ ਰਹੇਗਾ ਉੱਥੇ ਉੱਥੇ ਰਹਿ ਜਾਏਗਾ ਫਿਰ ਹਾਂਜੀ ਹੁਣ ਗੁਰਨਾਥ ਸਾਹਿਬ ਵੱਲੋਂ ਉਪਦੇਸ਼ ਹੈਗਾ ਜੀ ਪੱਟੀ ਮਹੱਲਾ ਪਹਿਲਾ ਛਛੇ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਆ ਛਛੇ ਛਾਇਆ ਵਰਤੀ ਸਭ ਅੰਦਰ ਛਾਇਆ ਕਉਨਾ ਪਰਬਲ ਹੋ ਗਿਆ ਹਾਂਜੀ ਤੇਰਾ ਕੀਆ ਭਰਮ ਹੋਆ ਹਾਂ ਤੇਰਾ ਕੀ ਕਹੇ ਤੇਰੇ ਪਾਇਆ ਹੋਇਆ ਭਰਮ तेरा ਆਪਣੇ ਆਪੇ ਪਾਇਆ ਨੇ ਪਾਇਆ ਪਾਇਆ पाया ਲੱਗ ਗਿਆ ਉਹਦੀ ਛਾਇਆ ਮਾਇਆ ਦੀ ਛਾਇਆ ਪੈ ਗਈ ਹਾਂਜੀ ਭਰਮ ਉਪਾਏ ਭੁਲਾਏਨ ਆਪੇ ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ ਭਰਮ ਪਾਇਆ ਨ ਭੁੱਲ ਗਏ ਤੋ ਆਪਣਾ ਘਰ ਭੁੱਲ ਗਏ ਬਾਹਰੇ ਰਹਿੰਦੇ ਨੇ ਪਰਦੇਸ ਤੇ ਪਰ ਮੈਂ ਪੁੱਛਦਾ ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ ਆਪੇ ਇਹੀ ਕਰਮ ਹੋਇਆ ਤੇਰਾ ਪਰ ਮਾਪੇ ਪਾਏ ਆਪੇ ਬੁਲਾਤਾ ਆਪੇ ਰੱਸੀ ਨੂੰ ਸੱਪ ਬਣ ਲਿਆ ਰੱਸੀ ਹੁਣ ਸੱਪ ਬਣੀ ਬੈਠੀ ਹੈ ਜਿੰਨਾ ਚਿਰ ਉਹਨੂੰ ਸਮਾਰ ਕੇ ਗਿਆਨ ਹਾਸਲ ਕਰੇ ਉਹ ਸੱਪ ਆ ਹੈ ਦੋਹਾਂ ਦਾ ਇਹ ਗੱਲ ਆਪੇ ਪਾਇਆ ਹੋਇਆ ਪਰ ਆਪੇ ਮੰਨਿਆ ਆ ਤੇਰਾ ਵੀ ਮੇਰੇ ਕਰੇ ਤੇ ਕੁਝ ਹੋ ਜੂ ਤਾਂ ਨਹੀਂ ਮਾਇਆ ਹਾਂਜੀ ਭਰਮ ਉਪਾਏ ਭੁਲਾਏਨ ਆਪੇ ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ ਹਾਂ ਤੇਰਾ ਕਰਮ ਹੋਆ ਹੋ ਗਈ ਤੇਰੀ ਆਪਣੇ ਆਪ ਤੇ ਫਿਰ ਗੁਰੂ ਤੈਨੂੰ ਗਿਆਨ ਵੀ ਮਿਲ ਜੂਗਾ ਅੰਦਰ ਲੈ ਦੇਖੋ ਅੰਦਰ ਨੇ ਮੰਨਿਆ ਵੀ ਉਹ ਪਹਿਲਾਂ ਬੁੱਧੀ ਨੇ ਸ਼ੱਕ ਪਾਈ ਐ ਤੇ ਕਿ ਵੀ ਕਿਦਾਂ ਤੂੰ ਸੱਪ ਲੱਗਦਾ ਉਹ ਕਹਿੰਦਾ ਸੱਪ ਹੀ ਐ ਰਸਤੀ ਨੂੰ ਅੰਦਰਲੇ ਨੇ ਦੋਹਰ ਕਰਤੀ ਤਾਂ ਬੁੱਧੀ ਮੰਨਦੀ ਐ ਫਿਰ ਵਿਆਖਿਆ ਆਈ ਐ ਨਾਉ ਪੂਰੀ ਨਾਉ ਚੁੱਕੀ ਜਵਾਬ ਦਿੱਤਾ ਵੀ ਜਿਵੇਂ ਤਾਂ ਲਾਈਟ ਵੀ ਲੱਗੀ ਕਹਾਂ ਗਏ ਤਾਂ ਸਿੱਪਾ ਸੱਪ ਅੰਦਰਲੇ ਦਾ ਹੀ ਹੋਣਾ ਅੰਦਰਲੇ ਨੇ ਫੈਸਲਾ ਕਰਨਾ ਅਸਲ 'ਚ ਮਨ ਨਹੀਂ ਕੁਝ ਵੀ ਹੁੰਦਾ ਫੈਸਲਾ ਅੰਦਰਲੇ ਦਾ ਹੀ ਐ ਜਿਹਦਾ ਮਨ ਐ ਉਸੇ ਨੇ ਫੈਸਲਾ ਕਰਨਾ ਵੀ ਕੀ ਲੈਣਾ ਕੀ ਨਹੀਂ ਲੈਣਾ ਕਿਰਪਾ ਕਰੇਗਾ ਦੂਏ ਪਾਸੇ ਲੱਗ ਜੇ ਤੇਰਾ ਕਰਮ ਹੋ ਜਵੇ ਤਾਂ ਤੂੰ ਸ਼ਬਦ ਗੁਰੂ ਨੂੰ ਵੀ ਮਿਲ ਸਕਦਾ ਹੈ ਜੀ। ਹਾਂ ਜੇ ਤੂੰ ਬੰਦੇ ਅੱਲਾ ਬੰਦੇ ਤਾਂ ਗੱਲ ਬਣਦੀ ਹੈ ਆਪਾਂ ਕਹਿੰਦਾ ਹੁਣ ਹੈਗਾ ਜੀ ਉਪਦੇਸ਼ ਪੱਤੀ ਮਹਲਾ ਤੀਜਾ ਚੋਂ ਜੀ। ਛਛੇ ਚੀਜ਼ਾਂ ਅਹਨਿਸਮੂੜੇ ਕਿਉਂ ਜਮ ਪਾਕੜਿਆ। ਅੱਛਾ ਛੀਜਾ ਐ ਨਸ ਬੂੜੇ ਰੋਜ ਤੂੰ ਤੇਰਾ ਜਿਹੜੇ ਬੁੱਧੀ ਦਾ ਨਾਸ ਹੁੰਦਾ ਕਿਉਂ ਛੂਟੇ ਜੰਮ ਪਕੜਿਆ ਪਰਮ ਦਾ ਕਰਿਆ ਹੋਇਆ ਛੁੱਟੇ ਨਾਲ ਕਿਵੇਂ ਜੇ ਪ੍ਰਚੰਡ ਹੋ ਗਿਆ ਤਾਂ ਗਿਆਨ ਵਧਾ ਬੁੱਧੀ ਨੂੰ ਤਕੜੀ ਕਰ ਤੂੰ ਬੁੱਧੀ ਨੂੰ ਕਮਜ਼ੋਰ ਕਰ ਰਿਹਾ ਬੁੱਧੀ ਦਾ ਰੋਜ ਕਮਜ਼ੋਰ ਹੋ ਰਹੀ ਹੈ ਫੇਰ ਹੀ ਛੁੱਟਣਾ ਪਰਮ ਤੋਂ ਦੇਖ ਬੇਕ ਬੁੱਧੀ ਹੋਊਗੀ ਸ਼ਕਤੀਸ਼ਾਲੀ ਉਹ ਬੁੱਧੀ ਤਾਂ ਛੁੱਟੂ ਪਰਮ ਕਿਉਂ ਛੂਟੇ ਜੰਮ ਪਕੜਿਆ ਜਦੋਂ ਦਾ ਫੜਿਆ ਕੰਮ ਛੁੱਟੇਦਾ ਗਿਆਨ ਤਾਂ ਰੋਜ਼ ਘੱਟੀ ਕਮਜ਼ੋਰੀ ਆਈ ਜਾਂਦੀ ਹੈ ਬੁੱਧੀ ਚ ਇਹ ਦੂਸਰੀ ਪੌੜੀ ਦਾ ਉਪਦੇਸ਼ ਸੀਗਾ ਜੀ ਛੱਛਾ ਚੀਜੇ ਐਨਸ ਮੂੜੇ ਪਾਕੜਿਆ ਹੁਣ ਹੈ ਜੀ ਪੰਜਵੇਂ ਪਾਦਸ਼ਾਹ ਦਾ ਉਪਦੇਸ਼ ਹੈ ਜੀ ਗੋੜੀ ਬਾਵਨ ਅਖਰੀ ਮਹਲਾ ਪੰਜਵਾਂ ਪੌੜੀ ਛੱਛਾ ਚੋਹਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਨੀ ਹਾਰੀ ਕਨੋ ਛੋਰੇ ਨਹੀਂ ਛੋਟੇ ਬੱਚੇ ਨੂੰ ਛੋਰਾ ਕਹਿੰਦਾ ਅਸੀਂ ਤਾਂ ਤੇਰੇ ਛੋਰੇ ਆ ਤੇਰੇ ਦਾਸ ਆ ਦਾਸ ਤੇਰੇ ਦਾਸ ਦਾਸਨ ਕੇ ਪਾਣੀ ਹਾਰੇ ਐਸੇ ਦਾਸਾਂ ਜਿੰਨੇ ਵੀ ਦਾਸ ਨੇ ਪਹਿਲਾਂ ਸਤੋਂ ਵੱਡੇ ਉਹਨਾਂ ਦੇ ਸਾਰਿਆਂ ਦੇ ਪਾਣੀ ਹਾਰੇ ਆ ਉਹਨਾਂ ਆ ਇੱਛਾ ਮੇਰੀ ਕੀ ਹੈ ਛਾਰ ਹੋਏ ਤੇਰੇ ਸੰਤਾਂ ਤੇਰੇ ਸੰਤਾਂ ਦੀ ਛਾਰ ਬਲ ਜਾਵੇ ਜਿਹੜੇ ਤੇਰੇ ਸੰਤ ਨੇ ਉਹਨਾਂ ਵਾਸਤੇ ਇੱਕ ਸੁਰਮਾ ਬਣ ਜਾ ਮੈਂ ਦੀ ਅੱਖ ਦੇ ਵਿੱਚ ਜਿਹਦੀ ਬੁੱਧੀ ਚ ਪੈ ਜਾਵਾਂ ਜਿਹੜਾ ਬੋਲ ਪੈ ਗਵੇ ਉਹ ਦੀ ਅੱਖ ਉਹਨੂੰ ਇੱਕੋ ਹੀ ਥਾਂ ਤੇ ਖਲ ਜਾਦਾ ਦੋ ਦੋ ਦਿਨਾਂ ਨੇ ਅੱਖ ਨੂੰ ਜਿਤਨੀ ਦੀਦਾ ਹੈ ਦੋ ਦੋ ਦੀਦੇ ਨੇ ਉੱਚੀ ਜੀ ਦੋਏ ਦੀਦੇ ਨੇ ਫਿਰ ਇੱਕੋ ਹੀ ਹੋ ਜਾਣਗੇ ਬਰਾਬਰ ਉੱਚੀ ਜੀ ਵੀ ਰਹੂਗਾ ਕੋਈ ਠੀਕ ਹੈ ਜੀ ਆਪਣੇ ਆਪਣੀ ਕਿਰਪਾ ਕਰੋ ਭਗਵੰਤਾ اے ਭਗਵੰਤਾ ਕਿਰਪਾ ਕਰੋ ਹੇ ਮੈਨੂੰ ਤੇ ਦੀ ਰਹਿਣ ਬਣਾ ਬਸ ਇੱਕੋ ਇੱਕ ਸਭ ਨੂੰ ਦਿਖੇ ਠੀਕ ਹੈ ਜੀ ਇਹ ਮੂਲ ਹੈ ਜੀ ਭਗਵੰਤਾ ਹਾਂ ਭਗਵੰਤਾ ਆਪਣਾ ਮੂਲ ਹੈ ਇਹ ਗਿ ਛਾੜ ਸਿਆਣਪ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਮੈਂ ਸਾਡੀ ਸਿਆਣਪ ਚਤੁਰਾਈ ਆਪਣੀ ਛੱਡ ਦਿੱਤੀ ਸੰਤਾਂ ਦੇ ਟੇਕ ਟਿਕਾਈ ਸੰਤਾਂ ਦਾ ਆਸਰਾ ਗੁਰਬਾਣੀ ਦੀ ਹਾਂ ਭਗਤ ਬਾਣੀ ਕੋਲ ਸੀਗੀ ਪਹਿਲੇ ਗੁਰੂਆਂ ਦੀ ਬਾਣੀ ਕੋਲ ਸੀ ਇਹਨਾਂ ਦੀ ਮੈਂ ਸਾਡਾ ਵੀ ਦੇਖ ਲਈਆ ਸਾਹਨ ਰਿਤੇਰੇ ਉਹਨਾਂ ਦੀ ਹੋਣੀ ਚਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਆ ਛਾਰ ਕੀ ਪੁੱਤਰੀ ਆ ਜਿਹੜੀ ਬੁੱਧੀ ਆ ਕਿਉਂ ਥੋੜੇ ਲਈ ਆ ਇਹ ਸੰਤਾਂ ਦਾ ਇਸ਼ਾਰਾ ਹੈ ਛਾਰ ਕੀ ਪੁੱਤਰੀ ਹੁਣ ਇਹ ਬਾਟੀ ਕੀ ਪੁੱਤਰੀ ਨਹੀਂ ਰਹੀ ਬਾਟੀ ਕੀ ਪੁੱਤਰੀ ਬਾਟੀ ਦਾ ਪੁੱਤਰਾ ਛੱਡਤਾ ਬਾਟੀ ਜੋ ਤਸੂਪ ਹੋ ਗਈ ਛਾਰ ਕੀ ਪੁੱਤਰੀ ਪਰਮਗਤੀ ਕੀ ਪੁੱਤਰੀ ਬਣ ਗਈ ਪਰਮਗਤ ਪਰਮਗਤੀ ਨੂੰ ਪ੍ਰਾਪਤ ਕੋਈ ਨਹੀਂ ਕੋਈ ਰੋਕ ਸਕਦਾ ਇਹ ਰਾਹ ਦੇ ਵਿੱਚ ਰੋਕ ਸਕਦਾ ਸੰਤ ਸਹਾਈ ਨਾਮ ਜਿਗਾ ਕੋ ਸੰਨਾਨ ਜਿਹਨੂੰ ਸੰਤ ਸਹਾਈ ਹੋਵੇ ਉਹ ਪਰਮਗਤੀ ਪਾ ਲੈਂਦਾ ਪਰਮਗਤੀ ਕਿਉਂਦੀ ਪਾਉਂ ਅੱਛਾ ਸੰਤ ਆਪਣੇ ਅੰਦਰ ਆਪਣਾ ਮੂਲ ਸੰਤ ਹੈ ਅੱਛਾ ਜੀ ਇਹ 23ਵੇਂ ਪੌੜੀ ਦਾ ਵਿਦੇਸੀ ਜੀ ਤੇ ਗੱਲ ਛੇ ਅੱਖਰ ਤੋਂ ਵੀ ਉਹੀ ਹੈ ਕਿ ਜੇ ਗਿਆਨ ਘਟ ਹੋਵੇ ਤਾਂ ਅੰਦਰ ਛਾਇਆ ਵੱਜ ਜਾਂਦੀ ਹੈ ਜੀ ਹਾਂ ਤੇ ਦੁਬਾਰਾ ਉਹ ਛਾਰ ਲੈ ਕੇ ਛਾਇਆ ਦੂਰ ਕਰਕੇ ਤੇ ਸੱਚਖੰਡ ਦੁਬਾਰਾ ਜਾਇਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਜੀ ਨਹੀਂ ਤਾਂ ਫਿਰ ਜਮਨੇ ਇੱਥੇ ਪਕੜ ਕੇ ਰੱਖਣਾ ਤੁਹਾਨੂੰ ਬਿਲਕੁਲ ਠੀਕ ਹੈ ਜੀ